ਟੂਟੇ ਨਹਿ ਕੇ ਬੋਲੇ ਸਹੀ ਟੂਟੇ ਬਾਹ ਦਹੂ ਜਿਸ ਗਈ ਜਦੋਂ ਕਹਿੰਦਾ ਪ੍ਰੇਮ ਟੁੱਟ ਜਾਂਦਾ ਅੰਦਰੋਂ ਫਿਰ ਉਹਦੀ ਬੋਲੀ ਸਹੀ ਨਹੀਂ ਰਹਿੰਦੀ ਅੱਛਾ ਬੋਲੀ ਬੋਲੀ ਜਿ ਵਰਗ ਪੈ ਜਾਂਦਾ ਫਿਰ ਉਹ ਪਹਿਲੀ ਬੋਲੀ ਨਹੀਂ ਨੇ ਇਹਦੀ ਪਹਿਲੀ ਬੋਲੀ ਪ੍ਰੇਮ ਦੀ ਹੁੰਦੀ ਹੈ ਦੂਜੀ ਇਹ ਟੁੱਟੇ ਬਾਹ ਦੋਹੂ ਗਈ ਉਹ ਜਿਹੜੀ ਮੈਂ ਡੁੱਟ ਜਾਂਦੀ ਹੈ ਦੋਏ ਪਾਸੇ ਤੇ ਖਿੱਚ ਲਈਏ ਬਾਹ ਨੂੰ ਟੁੱਟੂਏ ਬਾਹ ਇੱਕ ਤਾਂ ਉਧਰੋਂ ਵੀ ਖਿੱਚ ਲਓ ਉਧਰੋਂ ਵੀ ਖਿੱਚ ਲਓ ਟੁੱਟ ਗਈ ਠੀਕ ਹੈ ਜੇ ਆਪਣੀ ਮਰਜ਼ੀ ਇੱਕ ਪਾਸੇ ਗੁਰਕਾ ਇੱਕ ਪਾਸੇ ਤੇਰਾ ਪਾਣਾ ਕਿ ਇਹ ਦੇ ਵਿੱਚ ਦਾ ਫਿਰ ਤੇਨੇ ਟੁੱਟੇ ਗਣੇ ਦੇ ਬਣਿਆ ਕੇ ਮੈਂ ਲੈਂਦਾ ਬਣਿਆ ਰਹਿਦਾ ਗੁਰ ਕੇ ਬਾਣੀ ਚੱਲਣ ਦੋਲੇ ਬਣੇ ਜਦ ਤੱਕ ਆਪਣਾ ਬਾਣਾ ਬੰਨੂ ਖਿੱਚ ਲਿਆ ਟੁੱਟ ਜੂਗੀ ਬੁਰਬੋਲ ਦੁਰਮਤ ਪਰ ਹਰ ਛਾਡੀ ਢੋਲ ਟੁੱਟ ਪ੍ਰੀਤ ਗਈ ਬੁਰਬੋਲ ਬੁਰਬੋਲ ਬੋਲੇ ਹਸੂ ਕਰੇ ਬਰਾਬਰੀ ਪ੍ਰੀਤ ਟੁੱਟਲੀ ਹੋ ਖਸਮੀ ਕਰੇ ਬਰਾਬਰੀ ਫਿਰ ਗਰਤੰਦਰ ਪਾਏ ਬੁੱਲਣਾ ਜੀ ਹਕਮ ਕਰ ਲਈ ਬਰਾਬਰੀ ਪ੍ਰੀਤ ਟੁੱਟਣੀ ਸੀ ਟੁੱਟਨੀ ਟੁੱਟ ਪ੍ਰੀਤ ਗਈ ਬੁਰ ਬੋਲ ਗੁਰਮਤ ਪਰਹਰ ਦੁਖੀ ਪਰਹਰ ਗੁਰਮਤੀ ਢੋਲ ਨੇ ਅਬ ਤੋਲਤ ਕਰਤੀ ਦੂਰ ਕਰਤੀ ਦਾ ਨਉ ਹੈ ਜਿਹੜੀ ਦੂਰ ਹੋਵੇ ਪਤੀ ਤੋਂ ਸੱਚ ਤੋਂ ਦੂਰ ਵਾਲੀ ਮੰਤ ਦਾ ਨੂ ਦੂਰ ਹੈ ਸਤੇਯਾਰ ਆ ਗਏ ਤੇ ਦੁਰਮਤੀ ਪਰਹਰ ਛਾਡੀ ਢੋਲ ਜਿੱਦਾਂ ਆ ਦੇ ਢੋਲ ਨੇ ਛੱਡਦੀ ਆਪ ਤੋਂ ਅਲੱਗ ਕਰਦੀ ਅੱਛਾ ਜੀ ਜਿਹੜੀ ਹਲਾਕ ਕੀਤੀ ਮਾਤਾ ਦਰਗੋਤਾ ਸਾਕੇ ਦੋਦ ਸਾਕੇ ਦੋਦ ਨਾਲ ਦੂਰੀ ਬਣ ਗਈ ਤੇਰਾ ਨਾ ਹੋ ਮੇਰਾ ਨਾ ਹੋ ਠੀਕ ਹੈ ਜੀ ਟੁੱਟੇ ਗੰਠ ਪੜੈ ਵਿਚਾਰ ਗੁਰ ਸ਼ਬਦੀ ਕਰ ਉੱਚੇ ਦਰਬਦੀ ਫੇਰ ਕੱਢ ਫੇਰ ਘਰ ਆਉਣਾ ਫੇਰ ਕੱਢਣੀਆਂ ਤਾਂ ਵਿਚਾਰ ਕਰੇ ਗਲਤੀ ਕੀਤੀ ਹੈ ਵਿਚਾਰ ਕਰ ਲਵੇ ਗਲਤੀ ਕੀਤੀ ਹੈ ਬਾਣੇ ਤੇ ਜਿਹੜਾ ਤੋਊਗਾ ਠੀਕ ਹੈ ਤੂੰ ਆਪਣੇ ਬਾਣੇ ਚੱਲ ਬਰਾਬਰੀ ਕਿਉਂ ਕੀਤੀ ਖਸਤੀ ਉਹਦੀ ਗਲਤੀ ਬੰਦ ਗਾ ਨੂੰ ਬਰਾਬਰੀ ਨਹੀਂ ਕਰਦੀ ਠੀਕ ਹੈ ਇਹਦਾ ਕਰ ਇਹ ਵਿਚਾਰ ਦੇ ਨਾਲ ਫਿਰ ਫਿਰ ਜੁੜ ਸਕਦੀ ਏ ਟੁੱਟੇ ਘਾੜੇ ਪੜੇ ਵਿਚਾਰ ਗੁਰ ਸ਼ਬਦੀ ਕਿਹਦਾ ਜੀ ਸਾਹਿਬ ਗੱਲ ਨੂੰ ਜਾ ਸਕਦੀ ਏ ਹੁਣ ਵੀ ਇਹ ਕਰ ਕਾਰਜਸਾਰ ਗੁਰ ਸ਼ਬਦੀ ਗੁਰੂ ਦੇ ਵਾਕਾਂ ਦੇ ਕਾਰਜਸਾਰ ਨੇ ਹੂੰ ਤਾਂ ਅਬਦੇਸ਼ ਜੋ ਗੁਰ ਬਾਣੀ ਕਹਦੀ ਐ ਆਪਣੀ ਮਰਜ਼ੀ ਵਿੱਚ ਖਸੂਰ ਨਹੀਂ ਸਕਦਾ ਕੋਈ ਵੀ ਜਿੱਥੇ ਮਰਜ਼ੀ ਖਸੂਰ ਲਈ ਉੱਥੇ ਹੀ ਡੁੱਟ ਜਾਂਦੀ ਹੈ ਗੱਡ ਉੱਥੇ ਠੀਕ ਹੈ ਜੀ ਲਾਹਾ ਸਾਤ ਤੇ ਡੁੱਟ ਠੀਕ ਹੈ ਜੀ ਠਾਕੁਰ ਪ੍ਰੀਤਮ ਲਾਲ ਠਾਕ ਲਾਹਾ ਕੀ ਅਸਲ ਸੱਚ ਹੈ ਲਾਹਾ ਨਾ ਆਵੇ ਟੋਟਾ ਟੋਟਾ ਚਉਂਦਾ ਹੀ ਨਹੀਂ ਹੈ ਸੱਚ ਦਾ ਜੇ ਲਾਹਾ ਟੋਟਾ ਤੇ ਥੋੜੀ ਠੀਕ ਹੈ ਜੀ ਨਾ ਸਾਚਨਾ ਆਵੇ ਟੋਟਾ ਰੂਪਨ ਠਾਕੁਰ ਪ੍ਰੀਤਮ ਮੋਟਾ ਤੇ ਆਪਾਂ ਬੰਦਾ ਗਿਆ ਲਿਆ ਪ੍ਰੀਤਮ ਗੋਟਾ ਗੋਟਾ ਬੜੇ ਦੁੱਖੇ ਦੇ ਅੱਛਾ ਜੀ ਗੁਜਰਾਤੀ ਦੇ ਦਾ ਬੁਲਗ ਬਟਾ ਮੋਟੋ ਹਾਂ ਹਾਂ ਗੋਟਾ ਬੜੇ ਦੁੱਖੇ